ਤੇ ਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਇੱਥੇ ਮਿਲਣ ਵਡਿਆਈਆਂ ਦਰਗਾਹ ਮੋਖ ਦਵਾਰ ਜੇ ਸਤਗੁਰ ਦੀ ਸੇਵਾ ਸੁਖੀ ਹੂੰ ਸੁਖਸਾਰ ਸੁਖੀ ਤਾਂ ਦੀ ਸੁਖ ਤਾਂ ਸੁਖੇ ਹੁੰਦੇ ਨੇ ਸੰਸਾਰੀ ਸੁੱਖ ਹੈ ਸੁੱਖਾਂ ਦੀ ਸਾਰ ਤੇ ਤੈਨੂੰ ਸੁੱਖ ਸੁਖੀ ਠੀਕ ਹੈ ਜੀ ਸੱਚੇ ਧੋਖਰੇ ਇਹਦੇ ਵਿੱਚ ਸੱਚੇ ਸੁਪਗਣ ਦੇਵੇਂ ਨਾ ਅਸੀਂ ਅੱਭੀ ਟੈਂਪਰੇਰੀ ਸੁੱਖਦੇ ਪਰਮਨਿਊਤ ਸੁੱਖ ਮਿਲਦੇ ਆਜਾ ਜੀ ਐਥੇ ਮਿਲਣ ਵਡਿਆਈਆਂ ਦਰਗਾਹ ਮੋਖ ਨੇ ਸਿਰਫ ਮਿਲ ਜਾਂਦੀ ਠੀਕ ਹੈ ਜੀ ਸੱਚੀ ਕਾਰ ਕਮਾਵਣੀ ਸੱਚ ਪੈਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੇ ਨਾਏ ਪਿਆਰ ਸੱਚੀ ਕਾਰਗਵਾੜੀ ਸੱਚੀ ਕਾਰ ਕਰਦਾ ਸੱਚ ਪਹਿਣਾ ਪਹਿਨਣ ਵਾਸਤੇ ਸੱਚੇ ਸੱਚੇ ਲੋਭ ਆਧਾਰ ਸੱਚੇ ਲੋਭ ਦੇ ਵਿੱਚ ਸਮਾ ਜਾਂਦਾ ਹੈ ਸੱਚੇ ਲੋਭ ਧਾਰਨ ਕਰਦਾ ਹੈ ਆਧਾਰ ਸੱਚਿਆਂ ਦਾ ਆਧਾਰ ਹੈ ਇਹ ਆਧਾਰ ਖਾਣਾ ਇਹ ਆਧਾਰ ਹੈ ਸੱਚੀ ਜਦ ਸੱਚ ਮਿਲੈ ਸੱਚੇ ਸੰਗਤ ਕਰਦਾ ਉੱਥੇ ਹੀ ਸੱਚ ਮਿਲਦਾ ਹੈ ਸੱਚੇ ਨਾਏ ਪਿਆਰ ਸੱਚੇ ਨਾਮ ਨਾਲ ਪਿਆਰ ਹੁੰਦਾ ਸੱਚੇ ਨਾਏ ਸੱਚੇ ਨਾਮ ਨਾਲ ਪਿਆਰ ਇਹ ਤਰ੍ਹਾਂ ਕੁਬਲ ਨਹੀਂ ਭਾਵ ਵੀ ਨਾਮੇ ਸ਼ਬਦ ਹਰਖ ਸਦਾ ਸੱਚੇ ਸੱਚਿਆਰ ਨਾਨਕ ਸਤਗੁਰੂ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਸੱਚੇ ਸ਼ਬਦ ਨਾਲ ਸਦਾ ਖੁਸ਼ੀ ਰਹਿੰਦਾ ਖੁਸ਼ ਰਹਿੰਦਾ ਹਰਖ ਹਰਖ ਕੁਝ ਹੋਸ਼ ਰੰਗ ਦੇ ਰਸਤੇ ਘਣਾ ਰਹਿਦੇ ਸੱਚਿਆ ਬੁਲਦੇ ਕਰਤਾ ਕਰਤਾਰ ਹਰ ਤੰਨੇ ਸਤਗੋਦੀ ਸੇਵਾ ਹੋ ਕਰਦਾ ਜਿਹਦੇ ਤੇ ਕਰਤਾਰ ਦੀ ਕਰਤਾਰ ਪਰਮੇਸ਼ਰ ਹੈ ਜੀ ਕਰਤਾ ਪੁਰਖ ਮੂਰਤਾਤਰੀ ਆਇਆ ਠੀਕ ਹੈ ਜੀ ਤੀਜਾ ਹੋਰ ਵਿਡਾਣੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰ ਛੋੜ ਵਿਖ ਲੱਗੇ ਵਿਖ ਖਟਣਾ ਮੇਖਰਾਸ ਚੱਕਰੀ ਕੀ ਆ ਹੋਰ ਬਰਾਂ ਦੀ ਚੱਕਰੀ ਬੜੇ ਬੜੇ ਲੋਕ ਮਾਇਆ ਹਟਾ ਰੀ ਨੇ ਮਾਇਆ ਦੀ ਕਮਾਈ ਜਿ ਲੱਗੇ ਹੋਏ ਨੇ ਮਾਇਆ ਤਾਂ ਕੀ ਕਰਦੇ ਵੀ ਮਿਲਦੀ ਆ ਉਹ ਕਹਿੰਦੇ ਤਰਕਜੀਵਨ ਚੱਕਰੀ ਹੋਰ ਵੀ ਹੈ ਵੱਡੀ ਵੱਡੀ ਇਦੋਂ ਪਰ ਗੁਰਮੁਖ ਲਈ ਜੋ ਉਹ ਗੋਸਤਾਲੀ ਦਿੱਤੀ ਹੈ ਜਮਾਨੇ ਸਭ ਦੇ ਦਾਨੀ ਚੱਕਰੀ ਤਿਰਨ ਦੇ ਐਸੇ ਮਾਹੌਲ ਚੜ੍ਹਨ ਦਾ ਵੀ ਤੇ ਰਹਿ ਜਿਤਕੀ ਗੋਦਨ ਠੀਕ ਹੈ ਜੀ। ਸੇਰ ਛੱਡਿਆ ਨਤਰੇ ਜਰਾ ਅਮਰਤ ਛੋੜ ਦਿਖ ਲੱਗੇ ਜਿਹੜੇ ਅਮਰਤ ਛੱਡ ਕੇ ਨਾਮ ਨੂੰ ਛੱਡ ਕੇ ਦਿਖ ਲੱਗੇ ਦਿਖਦੀ ਕਮਾਈ ਕਰਨ ਲੱਗੇ। ਇੱਕ ਖਟਣਾ ਰਾਸ। ਵਿਖੇ ਉਹਨਾਂ ਦੀ ਕਮਾਈ ਹੈ ਬੇਟੀ ਉਹਦੀ ਜਮਾ ਪੂੰਜੀ ਹੈ। ਰਾਜ ਜਮਾ ਪੂੰਜੀ ਵੀ ਵਿਖੇ ਹੈ। ਠੀਕ ਹੈ ਜੀ। ਇਹ ਠੀਕ ਹੈ। ਪਹਿਲੇ ਸ਼ਲੋਕ ਤੋਂ ਉਹ ਗੁਰਮੁਖਾਂ ਦਾ ਸ਼ਲੋਕ ਹੈ, ਮਨਮੁਖਾਂ ਦਾ ਲੱਗਦਾ। ਠੀਕ ਹੈ ਜੀ ਬਿਖ ਖਾਣਾ ਬਿਖ ਪਹਿਨਣਾ ਬਿਖੋ ਮੁਖ ਗਿਰਾਸ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆਂ ਨਰਕ ਨਿਵਾਸ ਬਿਖਦੇ ਜੋ ਵੀ ਬਿਖੇ ਪੰਢੀ ਜੋ ਖਾਣਾ ਸੰਸਾਰ ਦਾ ਬਿਖਿਆ ਹੋਇਆ ਸਰੀਰ ਵੀ ਬਿਖਿਆ ਜੋ ਖਾ ਰਿਹਾ ਉਹ ਵੀ ਬਿਖਿਆ ਮਾਇਆ ਜੋ ਹੈ ਸਭ ਬਿਖਈ ਹੈ ਬਿਖਈ ਹੈ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆਂ ਨਰਕ ਨਿਵਾਸ ਇੱਥੇ ਦੁੱਖੇ ਦੁੱਖ ਦੀ ਕਮਾਈ ਹੈ हरियाणा तो नरक दे विच बस नरक निवास तो की भाव है की एठो भी ठल्ले जाएगा जीमे वे तो आइजो जब ज्ञान रीए खबर घड़ी बदलते जाऊं और दूजा ਜਵਨ ਦਾ ਗਿਆਨ ਨਹੀਂ ਕਾਮ ਕਰੋਦ ਵਿਨਾਸ਼ ਆਪ ਗੋਦ ਦੇ ਨਾ ਲਾਖੀ ਤਵੇ ਬੜਕਨੇ ਜੀ ਤਰੁਲਾ ਸਾਹਿਬ ਗੋਦ ਨਾਗੋਰ ਕਾ ਪਉ ਛੋੜਿਆ ਮਾਨਟ ਕਮ ਨਾ ਆਵੇ ਉਹ ਜੀ ਛੋੜਦਾ ਨੀਕ ਭਗਾਰ ਕੋਈ ਛੋੜਦਾ ਉਰਵਲੇ ਵਿੰਗਾਂ ਕਵਾਈ ਜਾਂਦੇ ਨੇ ਜੋ ਬੁੱਲੇ ਉਹਨਾਂ ਨੇ ਉਹ ਪਾਸੇ ਜਾਈ ਜਾਂਦੇ ਗੁਰਮੁਖੀ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦਰੜਾਇਆ ਤੋ ਸਤਗੁਰ ਪੂਜੋ ਦਿਨ ਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਉਹ ਸਤਗੁਰ ਤੂ ਉਹ ਜੋ ਸਾਜ ਰੋਜ ਰੋਜ ਹਰ ਹਰ ਅੱਲਹੁ ਅੱਲਹੁ ਅੱਲਹੁ ਕਰਵਾਇਆ ਉਹ ਨੂੰ ਲਭੋ ਉਹ ਪੂਜਣ ਦੇ ਕਾਬਲ ਹੈ ਉਹਦੇ ਦੇ ਕਲਗੁਸਤਨ ਰੱਖ ਦੋ ਅੰਗਨਾਂ ਕੋ ਕੋਚੜਾਂ ਜੋ ਜਗਦੀਸ਼ ਜਪਾਇਆ ਜਗਨਨਾਥ ਜਗਤ ਦਾ ਜਿਹੜਾ ਨਾਮ ਹੈ ਜਗਤ ਦਾ ਜਿਹੜਾ ਈਸ਼ ਹੈ ਉਹ ਦੱਸਿਆ ਤੁਹਾਨੂੰ ਸਮਝਾਇਆ ਉਹਨ ਜਗਨਨਾਥ ਪੁੱਜੋ ਸੋ ਸਤਗੁਰ ਦੇਖੋ ਇੱਕ ਨਿਮਕ ਨਿਮਕ ਜਨ ਹਰਕਾ ਕਾ ਹਰ ਨਾਮ ਬਤਾਇਆ ਥੋੜਾ ਜਿਹਾ ਵੀ ਤੁਹਾਨੂੰ ਰਸਤਾ ਬਤਾ ਦਤਾ ਜਿਹੜਾ ਸਾ ਬਤਾਤਾ ਉਹ ਜਿਹੜਾ ਉਹ ਜਾਏ ਥੋੜੀ ਦੇਰ ਵਾਸਤੇ ਪਰ ਉਹ ਇਹਨਾਂ ਅੱਖਾਂ ਨਾਲ ਤਾਂ ਨਹੀਂ ਦੇਖਿਆ ਜਾ ਸਕਦਾ ਨਾ ਜੀ ਸਤਗੁਰ ਦਾ ਖਾਣੋ ਦੇਖਿਆ ਜਾ ਸਕਦਾ ਰਸਤਾ ਵੀ ਦੇਖਿਆ ਜਾ ਸਕਦਾ ਰਸਤਾ ਜਾ ਸਕਦਾ ਸਤਗੁਰ ਮਤਲਬ ਜਦੋਂ ਕੋਈ ਉਪਦੇਸ਼ ਦੇਣ ਆਵੇ ਤੁਹਾਨੂੰ ਪਰ ਉਹ ਪੂਰਾ ਗਿਆਨ ਹੋਵੇ ਉਹਨੂੰ ਹਾਂ ਠੀਕ ਹੈ ਦੇਖੋ ਇਕ ਨਿਮਕ ਨਿਮਕ ਜਨ ਹਰ ਕਾ ਹਰ ਪੰਥ ਬਤਾਇਆ ਇਹਨੇ ਦਸ ਕੱਢੀ ਜੇ ਤੁਨ ਪੰਥ ਬਤਾਤ ਸਾ ਬਹੁਤ ਜਲਦੀ ਲਾਇਆ ਇੱਕ ਨਿਮਕ ਦੇ ਵਿੱਚ ਦੇਵੀ ਦੇ ਦਰਸ਼ ਪ੍ਰਾਪਤ ਸਤਿਗੁਰ ਕੀ ਸਭ ਲਗੀ ਭਾਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤੀ ਭੰਡਾਰ ਲਹਾਇਆ ਇਹ ਆਧਾਰ ਭਗਤ ਪੜ੍ਹਾ ਲਾਇਆ ਇਹ ਆ ਭਗਤੀ ਦਾ ਪੜ੍ਹਾ ਲਾ ਪੜ੍ਹਾ ਲੇ ਲਾ ਕੇ ਤੁਹਾਡੇ ਅੱਗੇ ਰੱਖ ਦਿੱਤਾ ਤੁਹਾਨੂੰ ਤੁਹਾਨੂੰ ਬਖਸ਼ਦਾ ਹੈ ਦਾ ਬੜਾ ਪਹਾਰ ਭਗਤੀ ਦਾ ਉਹ ਸਤਿਗੁਰੂ ਮਕੋਤਨ ਤਨ ਪਹਿਲਾਂ ਤੁਹਾਡੇ ਅੱਗੇ ਰੱਖਿਆ ਲਾ ਹਲ ਹੈ ਠੀਕ ਹੈ ਪਹਿਲੀ ਪੰਕਤੀ ਸੀ ਤੇ ਸਤਿਗੁਰ ਕੀ ਸਭ ਪੱਗੀ ਪਾਵੋ ਜਿਨ ਮੋਹ ਅੰਧੇਰ ਛੁਕਾਇਆ ਪੱਗੀ ਪੈਣ ਦਾ ਕੀ ਭਾਵ ਹੈ ਚੱਲ ਵੀ ਭਾਵੋ ਚੱਲਦੀ ਚਰਨੀ ਦਾ ਮਤਲਬ ਜੋ ਰਸਤਾ ਦੱਸਿਆ ਉਹਦੇ ਪਿੱਛੇ ਪਿੱਛੇ ਚੱਲੋ ਹਾਂ हां ओज रसत रूप नाओ ठीक है हुन इथे सतगुरु कहो सब तन तन जिनी हर भक्ति भंडार लहाया भक्ति भंडार लहाया ਥੱਲੇ ਲਾ ਲਿਆ ਉੱਪਰ ਸਤਿਗੁਰ ਦੀ ਥੱਲੇ ਲਾ ਕੇ ਰੱਖਦੀ ਤੁਹਾਡੇ ਕੋਲ ਅਸ ਇੱਥੇ ਸਤਿਗੁਰ ਨੂੰ ਉਹਨਾਂ ਨੇ ਸਿਹਾਰੀ ਨਹੀਂ ਲਾਈ ਤਾਂ ਮਤਲਬ ਇਹ ਜੋ ਸਤਿਗੁਰ ਹੈ ਇਹ ਫੇਰ ਸਰੀਰ ਰੂਪ ਚ ਕੋਈ ਇਹ ਸਤਿਗੁਰ ਵਿਅਕਤੀ ਦੇ ਰੂਪ ਆਇਆ ਹੋਇਆ ਠੀਕ ਹੈ ਇਹ ਵਿਅਕਤੀ ਲੱਗਦਾ ਹੈ ਜੀ ਹਾਂ ਇਹ ਲਹਾਇਤੋ ਕੀ ਬਣਦਾ ਜੀ ਮੈਂ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ ਆ ਕੀ ਬਾਈ ਨਾ ਕੇ ਥੱਲੇ ਤੁਹਾਡੇ ਸਾਹਮਣੇ ਰੱਖ ਦਿੱਤਾ ਖਾਓ ਖਰਚੋ ਲੰਮੇ ਭਾਈ ਠੀਕ ਜੀ ਇੱਥੇ ਤੀਸਰੀ ਪੌੜੀ ਸਮਾਗਤੀ ਹੈ ਜੀ